श्लोक ग्रह रचना अपारंग मन विलास स्वआदंग रसत कदानच मैं सिमरंत नानक ते बिष्टा क्रमै ग्रह रचना अपारंग अठे संसार अपार, है ता ज्यादा है साडे वास्ते है ਜਿਹੜਾ ਸੰਸਾਰ ਦੇ ਸੁਆਦ ਨੇ ਸੰਸਾਰੀ ਸੁਖ ਇਹਨਾਂ ਤੇ ਜੀ ਉਲਝਿਆ ਹੋਇਆ ਹੈ ਪਤਾਨ ਤੇ ਨੈ ਸਰੰਤ ਕਦੇ ਉਹ ਹਾਲੇ ਨਹੀਂ ਆਉਂਦਾ ਚੇਤਾ ਹੀ ਨਹੀਂ ਆਉਂਦਾ ਕਿ ਮੈਂ ਕਿੱਥੇ ਆਇਆ ਜਿਹੜਾ ਕੰਮ ਮੈਂ ਚੱਲਣਾ ਆਇਆ ਉਹਨੂੰ ਭੁੱਲਿਆ ਹੋਇਆ ਹੈ ਜੋ ਕਰਨ ਆਇਆ ਸੀ ਉਹ ਭੁੱਲਿਆ ਹੋਇਆ ਵਿਸਰਿਆ ਹੋਇਆ ਹੈ ਸਮਰਨ ਹੈ ਉਹ ਚੇਤਾ ਨਹੀਂ ਜੇ ਭੈ ਕੇ ਵਿਸਾ ਦੇ ਕੀੜੇ ਉਹਨਾਂ ਨੂੰ ਕਿਹਾ ਹੈ ਕਹਿੰਦੇ ਉਹ ਮਾਇਆ ਦੇ ਕੀੜੇ ਨੇ ਉਹ ਜਿਹੜੇ ਨੇ ਉਹ ਵਿਸਾ ਜੋ ਕਰਨਾ ਹੈ ਨੇ ਤੋ ਸਾਈਂ ਜੇ ਵਿਸਰ ਨਾਨਕ ਸੋ ਤਨਖੇਲੇ ਬੜੇ ਬੜੇ ਜਿਹੜੇ ਡੰਬਰ ਨੇ ਮੋਤੀ ਡੰਬਰ ਬੜੇ ਬੜੇ ਬਹੁਤ ਵੱਡੇ ਵੱਡੇ ਜਿਹਨਾਂ ਨੂੰ ਅਰਪਾ ਫਰਪਾ ਰੁਪਈਆ ਝੜਾਵਾ ਚੜਦਾ ਕਰੋੜਾਂ ਰੁਪਈਆ ਖਰਚ ਕਰਦੇ ਨੇ ਜੋੜ ਮੇਲੇ ਆ ਤੇ ਜੋਨਾਂ ਦੇ ਹੁੰਦੇ ਨੇ ਉਹ ਜ ਉਹਨਾਂ ਦੇ ਵਿੱਚ ਹੈ ਕੀ ਉਹਨਾਂ ਦੇ ਵਿੱਚੋਂ ਕੀ ਹੈ ਮੁਹੱਬਤ ਨੇ ਮਾਇਰਾ ਦਾ ਹੈ ਜਦੋਂ ਮਾਇਆ ਦਾ ਮੋਹ ਹੈ ਖਾ ਨੂੰ ਦੇਖਣ ਵਾਲੀ ਕੋਸ਼ਿਸ਼ ਭਗਤੀ ਭੁਗਤੀ ਆ ਦੀ ਕੋਈ ਗੱਲ ਨਹੀਂ ਹੈ ਮੇਰਾ ਕਾਰੀ ਦੁਨੀਆ ਵੀ ਕੋਈ ਧਿਆਨ ਨਾ ਇਹ ਵਰਤਿਆ ਨੇਜ ਜੇ ਇਕੱਲਾ ਹੁੰਦਾ ਤਾਂ ਵਾਲਾ ਜੋ ਹੁੰਦਾ ਮਾਇਆ ਦਾ ਮੋਹ ਠੀਕ ਹੈ ਜੀ ਉਹ ਨਾਨਕ ਸੋ ਤਨਖੇ ਉਹ ਜਿਹੜਿਆਂ ਨੂੰ ਉਹ ਸਾਈਂ ਵਿਸਰਿਆ ਹੋયા ਹਨਾ ਜੋਤ ਬੁਝਰੀ ਹੋਈ ਹੈ ਉਹਨਾਂ ਦਾ ਤਾਂ ਤਾਂ ਖੇ ਹੀ ਹੈ ਪਿੱਛੋਂ ਚਾਹੇ ਉਹ ਬੜੇ ਬੜੇ ਆਪਣੇ ਆਪ ਨੂੰ ਗਿਆਨੀ ਕਹੋਂਦੇ ਨੇ ਗੁਰੂ ਕਹੋਂਦੇ ਨੇ ਉਹਨਾਂ ਦੇ ਸ਼ਰੀਰ ਦੀ ਖੇਡ ਉਹ ਪਿੱਛੇ ਨਾ ਉਹਨਾਂ ਨੇ ਸਮਾਦੀ ਦੇ ਦੇਣੀ ਹੈ ਸ਼ਰੀਰ ਨੂੰ ਉਹਨਾਂ ਦੀ ਗੱਲ ਨਹੀਂ ਕਿਸੇ ਨੇ ਯਾਦ ਰੱਖਣੀ ਧਰਤਾਂ ਦੀ ਗੱਲ ਦੀ ਗੱਲ ਦਾ ਮੁੱਲ ਹੈ ਸ਼ਰੀਰ ਦਾ ਮੁੱਲ ਨਹੀਂ ਉਹਨਾਂ ਦੀ ਸ਼ਰੀਰ ਦਾ ਮੁੱਲ ਹੈ ਉਹਨਾਂ ਦੀ ਗੱਲ ਹੁੰਦੀ ਹੀ ਨਹੀਂ ਕੋਈ ਸਮਝ ਗੱਲ ਦਾ ਨਾ ਕੋਈ ਮੁੱਲ ਨਹੀਂ ਗੱਲੋਂ ਨਾ ਕੋਲ ਆ ਸਾਡੇ ਤੋਂ ਉਹ ਨਿਸ਼ਾਨੀ ਆ ਉਹਨਾਂ ਦੀ ਉਹ ਦੁਆ ਦੇ ਨਿਸ਼ਾਨੇ ਕੀ ਹੁੰਦੀ ਹੈ ਫਰੀਦ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਸੁੰਦਰ ਸੇਜ ਅਨੇਕ ਸੁਖ ਰਸ ਖੋਗਣ ਸੁੰਦਰ ਹੋਵੇ ਸੁਖ ਹੁਣ ਪੂਰੇ ਰਸ ਹੋਣ ਸੰਸਾਰ ਜਿੰਨੇ ਰਸ ਸੰਸਾਰ ਉਹ ਵੀ ਹੁਣ ਪੂਰੇ ਖੋਗਣ ਵਾਸਤੇ ਅਰ ਪੂਗ ਵੀ ਰਿਹਾ ਹੋਵੇ ਸੋਹਣੇ ਕਾਰਫੂਨ ਬਣੇ ਹੋਏ ਚੰਦਨ ਦੀ ਸੁਗੰਧ ਵੀ ਹੋਵੇ ਉਤਮ ਤੇ ਮੋਤੀ ਹੀਰੇ ਵੀ ਹੋਣ ਸਾਰੀਆਂ ਸੁਖ ਸੁਭਦਾਵਾਂ ਹੁਣ ਮਨ ਇੱਛੇ ਸੁਖ ਮਾਣਦਾ ਕਿਛੁ ਨਹੀਂ ਬਸੂਰੇ ਜਿਨੈ ਮਨ ਨੂੰ ਸੁਖ ਚਾਹੀਏ ਨਾ ਸਾਰੇ ਮਾਣਦਾ ਹੋਵੇ ਮਨ ਇੱਛੇ ਸੁਖ ਮਾਣਦਾ ਕਿਛੁ ਨਹੀਂ ਬਸੂਰੇ ਆਵਈ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨਤੀ ਰੇ ਔਰ ਜੇ ਉਹ ਪ੍ਰਭ ਹੋਵੇ ਜੇ ਆਪਣਾ ਮੂਰਣਾ ਜੇਤੇ ਹੋਉਂਦਾ ਹੋਵੇ ਕਾ ਸਮਝੋ ਵਿਸਤਾ ਸਾਥੀ ਲਈਓ ਉਹ ਵਿਸਤਾ ਕੇ ਕੀੜੇ ਨੇ ਜਿਹੜੇ ਕਹੇ بڑے بڑے ਅਮੀਰ ਆਦਮੀ ਨੇ ਸਾਰੀਆਂ ਸੁੱਖ ਸੁਭਦਾਵਾਂ ਹੋਈਆਂ ਨੇ ਸਭ ਕੁਝ ਉਹਨਾਂ ਕੋਲ ਸਾਧਨ ਨੇ ਪਰ ਜੇ ਪ੍ਰਭੂ ਕੇ ਤਮੀਏ ਤਾਂ ਵਿਸਤਾ ਕੀੜੇ ਨੇ ਬਿਨ ਸ਼ਾਂਤ ਹੋਏ ਕਿਤ ਵਿਦਵੰਤੀ ਜੇ ਕਿਉਂਕਿ ਜੋਤ ਲੈ ਗਿਆਨ ਬਣਾ ਆਪਣੇ ਮੂਲ ਨਾਲ ਜੁੜੇ ਤੇ ਬਿਨ ਮਨ ਨੂੰ ਸ਼ਾਂਤੀ ਹੋਣੀ ਨਹੀਂ ਉਹਨਾਂ ਦੇ ਤੇ ਉਹਨਾਂ ਦੇ ਮਨ ਨੂੰ ਪੀਰ ਜ ਆਵੇ ਕਿਵੇਂ ਪੀਰ ਜ ਨਹੀਂ ਆ ਸਕਦਾ ਉਹਨਾਂ ਦਾ ਮਨ ਸ਼ਾਂਤ ਨਹੀਂ ਹੋ ਸਕਦਾ ਉਹਨਾਂ ਦੇ ਭਟਕਣਾ ਕੀ ਜਾ ਨਾਲ ਜੁੜੇ ਤੇ ਮਨ ਨਹੀਂ ਟਿਕ ਸਕਦਾ ਸੁਖ ਸੁਖ ਦਾ ਸੁਖ ਦਾ ਮਨ ਠੀਕ ਹੈ ਜੀ ਇੱਥੇ 6ਵੀਂ ਪੜ੍ਹਾਈ ਸਮਾਪਤੀ ਹੈ ਜੀ